ਸਰਦਾਂ ਫਰਕਾ ਵੀ ਤਾਂ ਮਖਾਣੀ ਕਾ ਸਾਖੀ ਸੁਣਾਨੇ ਜੀ ਸਵੇਂਦੇ ਜਿਆ ਦਵਰਾ ਖਾਰੇ ਸਭ ਗਏ ਹਰੀ ਸਿੰਘ ਦੇ ਨੇ ਸੇ ਕਿਸਾਨੋ ਜੀ ਦਵਰਾ ਗਿਆ ਦਵੋ ਸੰਤਾ ਮੈਂ ਅਸੀ ਸਾਮੀ ਅਜਾ ਦੀ ਮੋਛ ਲੈ ਕੇ ਆਏ ਤੇ ਆਪਾਂ ਜਣ ਪੁੱਛਿਆ ਜੀ ਭਜਨ ਕੋਈ ਦਿਆ ਸਿਆਲ ਕੋ ਦਾ ਜਵਾਹੀ ਸਦਾ ਉਹ ਲਗੇ ਆ ਬਹੁਤ ਸਾਹ ਸੰਗਤ ਚ ਜੀ ਸਾਦਾ ਤੇ ਜੋਲ ਖਲੋੜੇ ਜੀ ਨਾਉ ਕਾਰ ਯਾਥੀ ਤੋਂ ਉਹਦਾ ਦੋ ਤਬਰ ਦਾ ਜੀ ਤੇ ਸਾਧਗਨ ਆਂਦਾ ਤੇ ਦਵਾਇਆ ਜੀ ਉਹ ਸਾਧ ਜੀ ਕੀਤੇ ਸੱਚੇ ਪਾਸ਼ਾ ਲੰਗਰ ਮੇਰਾ ਚੱਲੇ ਜੀ ਯਾਰ ਸਾਧਗਨ ਆਂਦਾ ਜਾਰ ਸਭ ਕੋਈ ਸਕਦਾ ਜੀ ਸਾਧਗਨ ਇਹ ਕਿ ਜਮਾਲ ਲਾ ਜਾਂ ਬਚਾ ਬਾਲਾ ਜਾਂ ਬਚਾ ਬੰਗਲਾ ਤੇ ਜਾਂ ਲਿਆ ਚਲਾਦਾ ਬਚੇ ਦੇ ਤਾਂ ਨਾ ਐ ਨਾ ਚੰਗੇ ਸਾਨੂੰ ਬਚਾ ਤੇ ਹੋ ਤੇ ਮੇਰਾ ਲੰਗਰ ਨਖ ਲਵੇ ਜੀ ਸਭ ਨਹੀਂ ਕੋਇਆ ਜੀ ਲੰਗਰ ਹੋਦਾ ਚੱਲਿਆ ਜੀ ਸਾਰ ਸੰਪਾ ਚ ਮੰਨਿਆ ਆਇਆ ਕੋਥੇ ਸਾਦਾ ਸੀ ਗੈਜ ਹੋਥੇ ਸਾਦਾ ਸੇ ਤਫਰਕਤਾ ਜੀ ਇਸ ਰੋਟੀ ਦੇਂਦਾ ਸੀ ਇਹ ਨਹੀਂ ਮੇਰੇ ਨਾਮ ਪਾਰੀਆਂ ਨਾ ਜਸਾ ਦੇਂਦਾ ਜੀ ਜਿਹਾ ਆਵੇ ਸਾਲ ਪੂਰਾ ਕਰਦਾ ਜੀ ਸੋ ਉਹ ਤੇ ਸਾਦਾ ਚੇਤਕ ਪਾਰ ਸਿਆ ਫੜਕਤਾ ਹੈ ਜੀ ਸਭ ਜਾਣ ਪਟਾਉ ਪਾਣੇ ਜੀ ਕਾਰਾਂ ਹੀ ਤਦਨੀਆਂ ਜੀ ਬਾਲਣ ਵਿੱਚ ਆਉਣਾ ਪਾਣੀ ਵੀ ਟੋਣਾ ਜੀ ਸੋਹੇ ਆਤਾ ਨਹੀਂ ਲਈ ਲੱਜ ਨੂੰ ਕਰਨਾ ਜੀ ਸਹਰਾਲ ਪੁਰਾਣੇ ਮਾਰ ਕੇ ਖੁੱਲ੍ਹੇ ਜਗ੍ਹਾ ਰਹਿਣ ਜੰਦੀ ਔਰਾਂ ਕਦ ਨਹੀਂ ਵਾ ਵਾ ਵਾਵਾ ਤੇ ਆਜ ਅਰਸਾਂ ਕਰਨਾ ਇੱਕ ਸਮਾਂ ਕੋਈ ਆ ਨਹੀਂ ਜੀ ਖਸੈ ਦਾ ਕੋਈ ਦੀਦੀ ਸਾਗ ਦਾ ਜੀ ਸੰਜੇ ਨੂੰ ਸਾਦੇ ਕੋੜੀ ਦੇ ਕਾਠੀ ਪਾਦ ਤੇ ਕੋਠਾ ਜੀ ਜਾਣਾ ਦੀਦੀ ਹੋ ਤੇ ਛੱਡ ਕੇ ਪੱਤੇ ਤੇ ਸੰਤਾ ਹੈ ਗਰ ਤੀਕ ਛੇ ਦਾ ਸਭਾ ਸਭਾ ਕਾਠੀ ਤਾਰੋ ਗਾਨ ਕਹਦਾ ਵੇ ਤੋ ਸਰ ਤਾ ਪਾਲ ਲੈ ਤੇ ਖੋੜੀ ਫਾਲ ਲੈ ਜੀ ਕੋਲੀ ਦੇ ਉੱਤੇ ਨਾ ਚੜੇ ਜੀ ਜਗਾਇ ਸੈਂਡੋ ਨੇ ਜੀ ਆਦਾ ਪਏ ਸੰਜੀ ਚੱਲਣ ਰਾਜਾ ਮੰਨ ਪਾ ਚੁੱਕੀ ਗਈ ਆਜ ਵੀ ਚੁੱਕੀ ਆਉਂਦੀ ਅਸੀ ਆਖਣਾ ਸੀ ਜੀ ਥਾਂਗਾ ਕਮ ਸੰਗਾ ਸਾਡੀ ਸੰਦਾ ਦਾ ਕੀ ਯਾਦ ਕਰੇ ਜੀ ਵਾਹ ਰੱਖੇ ਜੀ ਅਸੀਂ ਚਾਹਦੇ ਹਾਂ ਕੀ ਆਖਣੇ ਸਾਡੀ ਯਾਦਗਰੀ ਕੀ ਰੱਖੇਗੀ ਜੀ ਹੁਕਮ ਸੇ ਸ਼ਾਹ ਲਾਜ ਹੋ ਗਿਆ ਸੇਜਾ ਦਾ ਕੰਨ ਨਹੀਂ ਸਾਡਾ ਦੱਸਤਾਈ ਨਾ ਹਾਂ ਉਹ ਕੜੀ ਲਿਜੇ ਜੀ ਆਏ ਤੇ ਚੈਤਾ ਗੱਲ ਰਹੇਗੀ ਕੋਈ ਨਹੀਂ ਕਰਾ ਸੇਜਾ ਕਹ ਯਾਰ ਆਪੇ ਤਾਂ ਕੋਈ ਦੋ ਦਗਾ ਕੋ ਕਟਾਮਾ ਆ ਗਿਆ ਜੀ ਫਰ ਤੂੰ ਆ ਦੇਖਾ ਨਹੀਂ ਕੋਈ ਆ ਰਹੀ ਜੀ ਆ ਲਸੀ ਤਾਂ ਜਿੱਥੇ ਵੰਦੇ ਗੱਲ ਹੋ ਜਾਂਦੀ ਵਾਹ ਵਾਹ ਵਾਹ ਤੰਨੂ تپاسیں برسا رہے ہیں جی اللہ دے بھاگا جی کے انداز سے ساری باتیں واہ واہ لال کا ساتھ سنتے تو رے دےچے واہ جی واہ آ لے دے ਸਾਤ ਦਾ ਕੋ ਜਾ ਲ ਹੋ ਗਈ ਭਾਈ ਦਰਿਆ ਚੜ੍ਹ ਆਇਆ ਜੀ ਸਾਤਾਂ ਜਾ ਦੇ ਦੇ ਦੇਰੀ ਚ ਆਨੇ ਸੀ ਜੀ ਸਾਤ ਕੱਟੇ ਹੁੰਦੀ ਮਰੋ ਸੰਤ ਨਹੀਂ ਲੱਗੇਗੇ ਮੈਂ ਦਰਸ਼ਨ ਕੀਤਾ ਭੈਣ ਪੁੱਛਿਆ ਥੰਦਾ ਦੀ ਸੁਭਿਆ ਇਹਦਾ ਹੋਤੋ ਬੇ ਨਾਮ ਆਜੋ ਤਰ ਤੋ ਸਿਆ ਤੋ ਤੋ ਰਾਇ ਜੀ ਸਾਹ ਸੰਗਾ ਕੱਠੀ ਹੋਈ ਸੰਤ ਗਾਇ ਭਾਈ ਇਹਨੂੰ ਵਾਖੋ ਦਰਿਆਦੂ ਕਦੇ ਕਾ ਗੂ ਜੀ ਤੇ ਸੰਤ ਰਤਾ ਦੇ ਆ ਸਾ ਪਹਿਲੇ ਸਾ ਮੇਲਾ ਸਾ ਦਾ ਦਰਸ਼ਨ ਕਰਨਾ ਸਾ ਸੰਗਾ ਦਰਸ਼ਨ ਕਰਨਾ ਸਾ ਨੂੰ ਰਤਾ ਦੇਸ ਹੈ ਜਾਏ ਕਿੰਨ ਟਾਗਤ ਹੋਵੇ ਕੋਈ ਵਿੱਚ ਵੜਿਆ ਨਾ ਜੀ ਸਾਰਾ ਫੜ ਦਾ ਗੁੱਝਾ ਆਸਨ ਦਾ ਨਾ ਕੇ ਤੇਹਲਾ ਗੀ ਜਾ ਪਲੇ ਲੋਕਾਂ ਪੈ ਹੁੰ ਤਸਾ ਜੀ ਜੇ ਦਰਿਆਓ ਸੇ ਤਰੇ ਯਾਗ ਜੀ ਸੋਥਾ ਕੀ ਵਾਜਾ ਵਜੇ ਸੋਕੰਫੈਸ ਹਾਇ ਲੰਗਰ ਖਲਾਜ ਜੇ ਪ੍ਰਸਾਦਾ ਚਲਣਾ ਚਾਹ ਲੈ ਜੀ ਦਰਗਾਹ ਜੀ ਆਦਾ ਹੈ ਮੈਂ ਉਸਨੂੰ ਉੱਥੇ ਚਾਦਾ ਆ ਲੰਗਰ ਦਰਗਾਹ ਲੰਗਰ ਕਾ ਆਦਾ ਹੈ ਇੱਕ ਘੜੀ ਵਿਚਾਲ ਕਰ ਲੋ ਮਾਇਆ ਤਾਂ ਸੁਣਿਆ ਗਿਆ ਜੀ ਅਗਰ ਭਾਈ ਤੋਂ ਫੁੱਗਣ ਸਾਹ ਦਾ ਤਾਏ ਇਹ ਤੁ ਨੂੰ ਖੁੱਬ ਤਾਂ ਨਹੀਂ ਕਲੰਦਾ ਜੀ ਸਭ ਤੋਂ ਛੋਟੀ ਕੱਥਾ ਅਗਰ ਮੈਂ ਇੱਕ ਗਾਲੀ ਕਰਨੀ ਕੋਸਿੰਦਾ ਵਾਹ ਵਾਹ ਵਾਹ ਵਾਹ ਕੀ ਦਾ ਆਚਾਰ ਜਾਲਾ ਕਿਤਾਬ ਚ ਲਾਪੇ ਗਾਇਸ ਤੇ ਆ ਬੈਠੇ ਬਾਈ ਚਾਹ ਕੇ ਪਰ ਕੋਈ ਕੋਈ ਖੱਤੋ ਕਿਤਾਬ ਦਾ ਕੋਈ ਸੰਦਾ ਦਾ ਜੀ ਉਹ ਕੋਈ ਆ ਗਿਆ ਹੂੰ ਕਾ ਕੋ ਸੰਦਾ ਸੀ ਤੇ ਨਮਨ ਦਸਾ ਸਮਾਇ ਤੇ ਜਾਇ ਲਾਈ ਜਾਣਾ ਮੈਂ ਤਾਂ ਨਹੀਂ ਦੇਣਾ ਆ ਜੀ ਚਰਾ ਨਾਲ ਮੈਨੂੰ ਕਿਹਾ ਕਦੀ ਚਲੇ ਚਲਾ ਆ ਚਾਹੀਓ ਕਹਾ ਕੋਮਸਾ ਦਾ ਲੰਗਰ ਖੁੱਲਾ ਜੇ ਫਸਾਦਾ ਸਕਦਾ ਛੇ ਲੈ ਜੀ ਇਹ ਮੈਂ ਤੇਰੇ ਸੁਨਿਆ ਦੇਣਾ ਹੈ ਪਰ ਲੰਗਰ ਦਾਖ ਲੋ ਦੇ ਜੀ ਆ ਗਏ ਜੀ ਦੀ ਜੇ ਏਕਾਰੀ ਵਾਲੀ ਮਰਜਾ ਕੋ ਦੇ ਸਕਦਾ ਤੋ ਦਾ ਲਗਾ ਜੰਨਾ ਸਹੀ ਨੇ ਲੈ ਜੀ ਆਹ ਦੋ ਦੂਰ ਲਾਈ ਉਹ ਵੀ ਤੋ ਦੀ ਜਾਏ ਜੀ ਖਾ ਮੇਰਾ ਖਜਲਾ ਬੰਦਾ ਦੀ ਦੀਆਂ ਨਾਲ ਜਾਦਾ ਸਕਦਾ ਮੈਂ ਨਾ ਰੱਪਿਆ ਤਾਂ ਮੈਂ じゃ ਦੀ ਦੀ ਤੂੰ ਕਿਉਂ ਛੋੜ ਜਾਣੀ ਐ ਜੀਰਾ ਪਹਿਸਾਬ ਦੇ ਲਾਤੇ ਮੈਂ ਗੁਰੂ ਦਾ ਤਾਂ ਸਾਸ ਨਾ ਤੁਰ ਕੇ ਦਰਸ਼ਨ ਕਰਾ ਜੀ ਮੇਰਾ ਬੱਦੀ ਜੀ ਕਾ ਤਾਂ ਤਾਂ ਸਾਹੀ ਮੇਰੀ ਕਾਇਨੀ ਜੀ ਮੰਮੀ ਐਸਾ ਲਾਜ ਕਰ ਕੇ ਆ ਤੋ ਤੇਰਾ ਤੋਰਾ ਪੰਦੇ ਜੀ ਮੈਨੂੰ ਆਪਣਾ ਦਾ ਮੇਰਾ ਲਾਲੇ ਕੋ ਟੰਦੇ ਵਾਦੀ ਮੇਰਾ ਮਰਿਆ ਫਿਰਦਾ ਮੈਂ ਘਰ ਪਰ ਨਾ ਕੋ ਤੇ ਨਾ ਕਾਜ ਸਾਧ ਧਤੀਦਾ ਜੀ ਸੋ ਵਿਰਾਤ ਬੜਾ ਭਰਾ